ਲਾਹ ਨਾਮ ਰਤਨ ਜਾ ਲਭ ਲੋਗ ਬਾਤ ਸੰਕਾਰ ਉਸਤਾ ਦੇ ਲਾ ਕੇ ਹੂੰ ਹੂੰ ਉਸ ਗਾ ਤੇ ਲਾ ਨਾਮ ਰਤਨ ਜਪਸਾਰ ਨਾਮ ਰਤਨ ਜਪਣਾ ਦਾ ਸਾਰ ਜਾਂ ਦਾ ਜਪਣ ਸਹੀ ਈਲਾ ਅnabla ਕਰ ਲਵਾ ਜੀ ਨੇ ਅਛਾ ਜੀ ਹੋਰ ਗਿਆ ਰੂ ਜੱਤੜ ਅਛਾ ਜੀ ਹੋਰ ਕੀ ਹੈ ਰੂ ਸਮਝਣ ਨਹੀਂ ਜੱਤੜਾਂ ਲੱਭ ਲੋ ਮਰਾ ਨੂੰ ਕਾਹ ਕਾਰ ਲੱਭ ਲੋ ਗੁਰੇ ਲਾੜੀ ਚਾੜੀ ਲਾ ਇਤਬਾਰ ਮਨਮੁਖ ਅੰਦਾ ਮੁਖਤ ਗਵਾਰ ਲਾੜੀ ਚਾੜੀ ਲਾ ਦਵਾਰ ਲਾੜੀ ਚਾੜੀ ਜਿਹੜੀ ਲਾਣ ਪ੍ਰਿਆਰ ਕਰਕੇ ਦਾ ਲਾਡਵਾਰੀਆ ਮਰੋ ਪਾ ਲਾੜੀ ਚਾੜੀ ਦੀ ਹੈ ਹਾਂ ਦੀ ਕੋਈ ਪ੍ਰਸਤਰਤਾ ਕਿਸੇ ਦਾ ਅੱਛਾ ਜੀ ਹਾਂ ਕੋਈ ਸਾਹ ਹੋਰ ਗੱਲ ਹੈ ਮਰੋ ਤੇ ਲਾੜੀ ਚਾੜੀ ਦਾ ਤੋਂ ਬੁੱਧ ਅੱਛਾ ਜੀ ਹਾਂ ਲਾੜੀ ਤੋਂ ਕੀਪਾ ਲਾਡ ਕਰਨਾ ਲਾਰਡ ਅੱਛਾ ਲਾਰਡ ਕਰਨਾ ਅੱਛਾ 40 ਤੋਂ ਲੌਗ ਕਰਨਾ ਤੇ ਲਾਇਤbaar ਚੁਗਲੀ ਹੁੰਦਾ ਜੀ ਉਹ ਆਦਵਾਰੀ ਇਹ ਬਣਾਉਣਾ ਇਹਦਾ ਆਦਵਾਰੀ ਇਹ ਫਿਰ ਅੱਛਾ ਜੀ ਮਨਮੁਖ ਅੰਦਾ ਮੁਗਤ ਗਵਾਰ ਆਉਦਾ ਲੜੀਆਰੀਆ ਤੁ ਬੁਲਬੁਲ ਦਾ ਹੂਦਵਾਰਿਆ ਠੀਕ ਹੈ ਜੀ ਲਾਹੇ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ ਨਾਇਕਾਂ ਨਿਆਸੀ ਜੱਗ ਵਿੱਚ ਸੰਸਾਰਾ ਜਹਾਰ ਰਹਿਣਾ ਮਜੂਰ ਗਿਆ ਠਗਾ ਠੱਗ ਮਜੂਰ ਕਰ ਬਿਲਕੁਲ ਠੀਕ ਜੀ ਹਾਂ ਬਠਰਾ ਕੇ ਠੀਕ ਹੈ ਜੀ ਆਇਆ ਤਾਂ ਲਾਇਨ ਸੀ ਪਰ ਠੱਗੀ ਖਾ ਕੇ ਚਲੇ ਗਿਆ ਜੀ ਹਾਂ ਠੀਕ ਹੈ ਜੀ ਲਾਹਾ ਨਾਮ ਪੁੰਜੀ ਵਸਾ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਲਾਗੇ ਲੋਕ ਪੁੰਜੀ ਨਾਮ ਦੇ ਪੁੰਜੀ ਹੈ ਅੱਛਾ ਜੀ ਕੀ ਪਤਾ ਸੱਤੇ ਪਾਛਾ ਬਹੁਤ ਹੋਇਆ ਠੀਕ ਹੈ ਜੀ ਬੀਬੀ ਦੀ ਹੈ ਜੀ ਤਾਂ ਪਰ ਕੰਮੀਰ ਸਾਡੇ ਜੀ ਵਿਸਾਦ ਕੀ ਭਾਵ ਜੀ ਵੀ ਬਸਾ ਨਹੀਂ ਖਾਣਾ ਲਾਹਾ ਨਾਮ ਪੂੰਜੀ ਬੇਸਾ ਵਦਾਲਾ ਬੁਣ ਰਕੀ ਤਲ ਅੱਛਾ ਜੀ ਕ੍ਰਿਧਨਾ ਕੀਆ ਸ੍ਰਿਧਨਾ ਕੀਆ ਲੈਣਾ ਕੀ ਸੀ ਹੁਣ ਸਾਥ ਲਾਭੁ ਦਿਨਨਾ ਸਹੀ ਗਏ ਜੀ